ਸੇ ਲੋਕ ਮਹੱਲਾ ਤੀਜਾ ਮਨਮੁਖ ਬੋਲ ਨ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕਥਾਉ ਜਾਣਨੀ ਸਦਾ ਚਿਤ ਵਹਿ ਵਿਕਾਰ ਇੱਥੇ ਗੋਲ ਮੁਖ ਨੂੰ ਕੋਈ ਹੈ ਇਹ ਹੈ ਹਾਂ ਜਿੰਨੇ ਵੀ ਮਨਮੁਖ ਤੇ ਉਹ ਬੋਲ ਹੈ ਅੱਛਾ ਜੀ ਆ ਜਿਹੜੀ ਭਾਸ਼ਾ ਹੈ ਨਾ ਉਹ ਰੂਕੀ ਭਾਸ਼ਾ ਬਰੂਖੇ ਬੋਲੀ ਨੀ ਨਹੀਂ ਜਾਣਦੇ ਜਾਣਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਇਹਨਾਂ ਨੇ ਜਾਣਣੀ ਵੀ ਹੈ ਦੀ ਉਹਨਾਂ ਨੂੰ ਕਿਹਾ ਉਹ ਵੀ ਇਹਨਾਂ ਨੇ ਜਾਣਣੀ ਹੈ ਮੁਕਤਾ ਛੱਡਣੀ ਨਹੀਂ ਦੇ ਉਹ ਇਹਨਾਂ ਛੱਡਣੀ ਉਹਨਾਂ ਨੇ ਜਾਣਣੀ ਹੈ ਉਹਨਾਂ ਅੰਦਰ ਕਾਮ, ਕ੍ਰੋਧ, ਅਹੰਕਾਰ ਸੱਜੀ ਜ ਉਹਨਾਂ ਦੇ ਅੰਦਰ ਹੈ ਇਸ ਕਰਕੇ ਉਹਨਾਂ ਨੇ ਜਾਣਣੀ ਹੋਈ ਨਹੀਂ ਉਹਨਾਂ ਨਾਲ ਪਰਬੋਧਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਜਿੱਥੇ ਗਾਹ ਕਰਨੀ ਵੀਰਾ ਗਾਂਠਣਾ ਹੋਰ ਉੱਥੇ ਇਹ ਗੱਠ ਖੋਲਣੇ ਦੀ ਆਪਾਂ ਸੌਦੇ ਦੀ ਥੋਕ ਥਾਉ ਨਾ ਜਾਣਣੀ ਸਦਾ ਕਿਸ ਤਰ੍ਹਾਂ ਉਹਨਾਂ ਨੂੰ ਤਾਂ ਥੋਕ ਥਾਉ ਦੀ ਪਤਾ ਥੋਕ ਥਾਉ ਕੀ ਹੈ ਉਹ ਦਸ ਬਦਵਾਰ ਸਰਕੂਟੀ ਨੂੰ ਹੈ ਜਾਂਦੇ ਨੇ ਅਸਲੀ ਦੌਲਤ ਤੇਰੀ ਨਹੀਂ ਹੈ ਦਸ ਬਦਵਾਰ ਉਹ ਕਥਾਉ ਨੂੰ ਥਾਉ ਕਹੀ ਜਾਂਦੇ ਨੇ ਕਿ ਗੁੜੀ ਦਿਮਾਗ ਨੂੰ ਦਸੂਰਦਾਰ ਬੁੱਲੀ ਜਾਂਦੇ ਅਰੇ ਨਾਵਣਾ ਨੇ ਇਹ ਜਾਨੂ ਦੀ ਕੋਸ਼ਿਸ਼ ਦੱਸ ਦਿੱਤਾ ਉਹ ਬਥੇਰੇ ਨੂੰ ਤੋਂ ਹੱਟੋ ਕਰਾਂ ਨਹੀਂ ਕਰਦੀ ਜਾਨ ਲੈਣ ਦੀ ਕੋਸ਼ਿਸ਼ ਨਹੀਂ ਕਰਦਾ ਸਦਾ ਜਦ ਮੈਂ ਬੁਕਾਰ ਉਹ ਬੁਕਾਰਦਾ ਸਦਾ ਜਦ ਬਿਦੇ ਉਹਨਾਂ ਨੇ ਛੱਡ ਲਈ ਉਹਨਾਂ ਨੂੰ ਕੀ ਲੋੜ ਹੈ ਮੰਗੀਆਂ ਆਪੇ ਸ੍ਰਿਸ਼ਟੀ ਉਪਾਇਨ ਆਪ ਕਰੇ ਵਿਚਾਰ ਦਰਗਾਹ ਲੈ ਕਬੂਦੀਆਂ ਨੇ ਜਾਣਨਾ ਤੇ ਲੇਖਾ ਕਿੱਥੇ ਆ ਜਾਣਾ ਦਰਗਾ ਕੀ ਹੈ ਦਰਗਾਹ ਅੰਦਰ ਚ ਤੇ ਕਿਤੇ ਗੱਲਾਂ ਵੀ ਕੀ ਕਰਕੇ ਜੀ ਤੂੰ ਭਾਈ ਮੈਂ ਤਾਂ ਸਾਹ ਲੈਦਾ ਰਿਹਾ ਮੇਰੇ ਦਾਦਾ ਗੱਲ ਲਈ ਸੁਣੀ ਉੱਥੇ ਹੋਇਆ ਕੂੜਿਆਰ ਉਹ ਦਰਗਾਹ ਚ ਕੂੜਿਆਰਾਂ ਤੋਂ ਲੈਖਾ ਲੁੱਗਿਆ ਜਾਂਦਾ ਹੈ ਦਾ ਤਾਂ ਲੈਖਾ ਇੱਥੇ ਪੜ ਜਾਂਦਾ ਹੈ ਜੋਨ ਕਿ ਤਨਕਾ ਲੇਖਾ ਪੜਿਆ ਦਰਗਾਹ ਹੀ ਕੂੜਿਆਰੇ ਹੁੰਦੇ ਨੇ ਤੇ ਚਾਰ ਹੁੰਦੇ ਹੀ ਨਹੀਂ ਉਥੇ ਜਦ ਨਹੀਂ ਦੀ ਦਰਗਾਹ ਉਹਨਾਂ ਦਾ ਰਸਤਾ ਹੀ ਹੋਰ ਹੈ ਆਪੇ ਸੋਚੋ ਭਾਈਆਂ ਆਪ ਕਰੇ ਵਿਚਾਰ ਉਹਨੇ ਆਪੇ ਤਾਂ ਸੱਚੀ ਪੈਦਾ ਕੀਤੀ ਹੈ ਜਿਹਦੇ ਜਿਹੜਾ ਅੰਦਰ ਬੈਠਾ ਉਹਦੇ ਹੀ ਸੱਚੀ ਪੈਦਾ ਹੁੰਦੀ ਹੈ ਉਹ ਆਪਣੇ ਮਨ ਤੇ ਆਪੇ ਵਿਚਾਰ ਕਰਦਾ ਵੀ ਇਹ ਗੁਰੂ ਜੇ ਕੀ ਕੀਤਾ ਗਲਤੀ ਹੋ ਗਈ ਮੇਰੇ ਵੀ ਗਲਤੀ ਹੋਊਗੀ ਮੈਂ ਵੀ ਕਈ ਵਾਰ ਇਹ ਕੀ ਕਰਦਾ ਰਿਹਾ ਕਈ ਗੱਲਾਂ ਜਿਵੇਂ ਵੀ ਤੇ ਗਲਤੀ ਕਿਹੜੀ ਜਿੰਨੇ ਬੱਚਿਆਂ ਨੂੰ ਆਪ ਬਗਾਲ ਲਏ ਤੇ ਕਈ ਵਾਰ ਅਸੀਂ ਪਿੱਛੇ ਪਛਤਾਉਂਦੇ ਹਾਂ ਤੇ ਨਾਲ ਵੀ ਕਰੇ ਵਿਚਾਰ ਵਿਚਾਰ ਵੀ ਫਿਰ ਆਪੇ ਕਰ ਕੋਈ ਵੀ ਆਪਣੇ ਕੀਤੇ ਤੇ ਆਪੇ ਕਰਦਾ ਹੋਜੀ ਨਾਨਕ ਕਿਸ ਨੂੰ ਆਖੀਏ ਸਭ ਵਰਤੈ ਆਪ ਸਚਿਆਰ ਦੰਨ ਨਾਲ ਕਹੀਏ ਜੀ ਨੂੰ ਉਹ ਜਿਹੜਾ ਸਚਿਆਰਾ ਮਨ ਹੈ ਆਪੇ ਵਰਤਦਾ ਸਾਰੇ ਉਹ ਸਚਿਆਰਾ ਵੀ ਕੋਈ ਆਪ ਦੀ ਜਦ ਗੱਲ ਮੰਨ ਲੈਂਦਾ ਉਹਦੇ ਪਿੱਛੇ ਲੱਗ ਲੈਂਦਾ ਫਿਰ ਫੌਣ ਹੁੰਦਾ ਸਮਝਾਈਏ ਜੀ ਆਪ ਵਰਤਦਾ ਸਾਰੀ ਸੰਸਾਰ ਚ ਉਹਦੀ ਸਹਿਮਤੀ ਬਿਨਾ ਕੋਈ ਕੰਮ ਨਹੀਂ ਕੀਤਾ ਹੈ ਉਹ ਸੋਚੇ ਸਾਡਾ ਸਹੀ ਬੁਨਾ ਪਰ ਸਾਹਿਬ ਇਹਦੀ ਮੈਨਾਂ ਕਰਦਾ ਕੁਝ ਵੀ ਨਹੀਂ ਜੀ ਜਦ ਆਪ ਹਾਸਦੀਪ ਕੂਏ ਪੜਨ ਦੀ ਚਿੰਤਾ ਸੰਦਰਸ਼ ਕੀ ਚੱਲ ਗਿਰਫੈ ਕੋਈ ਗਲਤੀ ਹਾਂਜੀ ਹਾਸਦੀਪ ਕੂਏ ਪੜ ਤੇ ਆਪ ਸੱਚਿਆਰ ਕੀ ਭਾਬ ਬਣਦਾ ਜੀ ਸਾਰੇ ਸਿੱਧਿਆ ਸੱਚਿਆ ਨੇ ਮਤਲਬ ਅਗੇ ਹਮ ਸਾਰੇ ਇਕੱਲਾ ਹੁਸ ਤੇ ਸਾਰੇ ਹਮ ਸਾਰੇ ਸੱਚਿਆ ਕਹਿੰਦੇ ਅੱਛਾ ਜੀ ਪਰ ਸਾਰਾ ਹੀ ਸੱਚਿਆ ਨਹੀਂ ਹੈ ਉਹ ਇਤਨੀ ਸੱਚ ਨਾਲ ਪ੍ਰੇਮਤਾ ਹੈ ਜਰੂਰ ਲਗਾਉਤਾ ਹੈ ਸੱਚ ਨਾਲ ਪਰ ਬੰਦ ਜਿਹੜਾ ਹੈਗਾ ਉਹਦੀ ਸਹਿਮਤੀ ਦੰਦਾ ਰਿਆਂ ਨੂੰ ਜਿੰਦਗੀ ਚ ਉਹ ਕਹਿੰਦਾ ਹੈ ਸਰਦ ਨਹੀਂ ਉਹ ਨਹੀਂ ਕੋਣਾ ਹੁੰਦੀ ਉਧਰਲੀ ਜਦੋਂ ਫਿਰ ਕਰ ਲੋ ਫਿਰ ਹਲੇ ਹਰ ਗੁਰਮੁਖੀ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਇ ਦੇਖੋ ਕਿਤੇ ਹਾਰ ਗੁਰਮੁਖੀ ਤੇਰੀ ਇਰਾਦੇ ਆ ਆराधना ਗੁਰਮੁਖ ਤੋਂ ਬਾਤ ਦੀ ਗੱਲ ਹੈ ਗੁਰਮੁਖ ਪਹਿਲਾ ਆराधना ਬਾਤ ਹੈ ਗੁਰਮੁਖ ਅਰਾਧੇ ਨੇ ਬਹੁਤ ਅਰਾਧਾ ਕਰਨੀ ਆ ਆराधना ਕਰਨ ਦੀ ਕੀਦੀ ਹੈ ਨਾਮ ਦੀ ਅਰਾਧਾ ਜਿਹੜੀ ਇਰਾਦਿਆਂ ਜਿਹੜੇ ਕਰਮ ਪ੍ਰਾਪਤ ਹੋਏ ਜਿਹਨਾਂ ਨੂੰ ਪਹਿਲਾਂ ਜਿਹਨਾਂ ਦੇ ਕਿਰਪਾ ਸੀ ਨਾ ਜਿਹਨਾਂ ਨੂੰ ਜਿਹਨਾਂ ਨੇ ਕਿਰਪਾ ਦੀ ਪ੍ਰਾਪਤ ਕਰਨ ਦੀ ਕਿਰਪਾ ਦੇ ਪਾਤਰ ਬਣ ਗਏ ਉਹ ਅਰਾਧਨਾ ਕਰਦੇ ਇਹਨਾਂ ਨੇ ਗਿਆਨ ਜਿਹੜਾ ਸੀ ਗੁਰਮੱਤ ਦਾ ਗਿਆਨ ਸਾਰਾ ਜਿਹੜੂ ਨੂੰ ਸੁਭ ਚਾ ਗਿਆ ਕਿਰਪਾ ਹੋ ਗਈ ਪਰ ਪ੍ਰਮੇਸ਼ਰ ਵੀ ਐਸੇ ਹਾਲਾਤ ਬਣਾਏ ਐਸੇ ਉਹਨੂੰ ਜੋੜਵੇਂ ਬਣਾਏ ਕਿ ਉਹ ਨਾਮ ਦੇ ਨਾਲ ਜੁੜ ਗਿਆ ਰੰਗ ਨਾਲ ਜੋੜਨ ਵਾਲੀ ਸੰਕਤ ਮਿਲ ਗਈ ਬੁੱਧੀ ਦਾ ਉਹ ਪਹਿਨਾਈ ਸੀ ਉਹਦੇ ਹਾਲਾਤ ਵਿਗੜਦੇ ਦਿੱਤੇ ਖਰਾਬੀ ਹੋਣ ਦਿੱਤੇ ਉਹ ਜੁੜਿਆ ਰਿਹਾ ਉਹ ਇਹ ਕਿਰਪਾਈ ਹੈ ਅਰਉ ਪ੍ਰਾਪਤੀ ਵੀ ਹੋ ਗਈ ਤੇ ਲੋਕ ਦੇ ਗਿਆਨ ਦੀ ਫਿਰ ਉਹਨਾਂ ਨੇ ਆਰਾਧਨ ਕੀਤੀ ਆਰਾਧਨਾ ਤੋਂ ਬਾਅਦ ਇਹ ਹੁੰਦੀ ਹੈ ਪਹਿਲਾਂ ਆਰਾਧਨਾ ਦੇਦੀ ਹੁੰਦੀ ਹੈ ਹਾਂਜੀ ਹੋ ਰਹੀ ਹੈ ਜੀ ਆਹ ਤ੍ਰਿਯਾ ਪੱਦੀ ਆਰਾਧਨਾ ਠੀਕ ਹੈ ਜੀ ਨਾਨਕ ਹਉ ਬਲਹਾਰੀ ਤਿਨ ਜਿਨ ਹਰ ਮਨੀ ਵਸਿਆ ਸੋਇ ਜਨ ਜਨ ਮਾਣੋਂ ਦੇ ਕੁਰਬਾਨ ਸਤੋ ਜਿਤੇ ਸਾਰੇ ਵਸਿਆ ਸੋਇ ਜਿਨ੍ਹਾਂ ਨੇ ਜਿਨ੍ਹਾਂ ਹਰ ਉਹਦੇ ਵਿੱਚ ਵੀ ਮਨ ਵਿੱਚ ਵੀ ਦੋਹਾਂ ਦੇ ਵਿੱਚ ਤੜੀਏ ਕੋ ਗਏ ਜਿਹੜੇ ਵਸਦੇ ਹੋਏ ਨੇ ਅਰ ਉਹਨਾਂ ਦੇ ਵਿੱਚ ਕੀ ਵਸੀ ਹੋਈ ਹੈ ਸੋਬਾ ਵਸੀ ਹੋਈ ਹੈ ਪਰਮੇਸ਼ਰ ਦੀ। ਬੰਨ ਕਰਕੇ ਵੀ ਬੰਦੇ ਰੂੜ ਕਰਕੇ ਵੀ ਉਹਨਾਂ ਵਿੱਚ ਹਰ ਦੀ ਸੋਬਾ ਹੀ ਵਸੀ ਹੋਈ ਹੈ। ਹੋਈ ਹਰ ਦੀ ਸੋਬਾ। ਦੀ ਸੋਬਾ ਹੀ ਵਸੀ ਹੋਈ ਹੈ। ਨਾਮ ਦੀ ਸੋਬਾ ਹੀ ਵਸੀ ਹੋਈ ਹੈ ਹੋਰ ਕੁਝ ਨਹੀਂ ਉਹਨਾਂ ਦੇਦਰ ਹੈ ਇਹ ਵੀ। ਨਾਮ ਕੇ ਕਰੇ ਕੇਵਲ ਨਾਮ। ਤਰਜੀਹ ਆਸ਼ ਕਰੇ ਸਭ ਲੋਕ ਬਹੁਤ ਜੀਵਨ ਜਾਣਿਆ ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ ਆਸ਼ ਕਰੇ ਸਭ ਲੋਕ ਸਾਰੇ ਲੋਕ ਆਸ਼ ਕੀ ਕਰਦੇ ਨੇ ਬਹੁਤ ਜੀਵਨ ਜਾਣਿਆ ਕਿ ਲੰਬਾ ਜੀਵਨ ਕਿਵੇਂ ਕਰਿਆ ਜਾਵੇ ਇਹ ਜਨਰਲੀ ਇੱਛਾ ਕਰਦੇ ਨੇ ਇਹਦੀ ਖੋਜ ਕਰਦੇ ਨੇ ਕਿਉਂਕਿ ਆਮ ਕਰਦੇ ਸੀ ਜੋ ਬਿਆਂ ਦਾ ਕੰਮ ਸੀ ਉਹਨਾਂ ਲੋਕ ਵੀ ਜਨਤਨ ਸਾਰੇ ਲੰਬੀ ਆਇਉ ਕਰਨ ਲੰਬੀ ਆਇਉ ਹੋਣ ਨੇ ਇੱਕ ਜੀਵਨ ਕੋ ਵਾਸਤੇ ਚੇਤਨਾ ਵੀ ਹੀ ਰਹੀ ਹੈ ਨਾਲ ਬੁੱਢੇ ਕਰਕੇ ਦੰਡੇ ਲੜੇ ਖੇਲੇ ਬੁੱਢਾ ਕੋ ਬਣਾਏ ਨੇ ਇਹਦੇ ਰਹੀਏ ਕੀ ਰੋੜ ਸੀ ਇਹ ਕਹਿੰਦੇ ਤੇ ਜੀਵਨ ਕੋ ਚਿੱਤ ਗੜ ਮੰਡਪ ਸਵਾਰੀਆਂ ਕੀ ਗਹਿਰੀ ਕਰਕੇ ਨੀਮ ਖੁਦਾਈ ਹੈ ਜੀ ਹਨ ਜੀ ਵੱਲ ਵੰਚ ਕਰ ਉਪਾਵ ਮਾਇਆ ਹਿਰ ਆਣਿਆ ਜਮ ਕਾਲ ਨਿਹਾਲੇ ਸਾਸ ਆਵ ਘਟੈ ਬੇਤਾਲਿਆ ਬਲਵੰਚਾ ਹੈਰਾ ਫੇਰੀ ਕਰਕੇ ਹਾਂ ਉਧਰ ਕੀ ਹੈ ਬਲਵੰਚਾ ਹੈਰਾ ਫੇਰੀ ਜਿਹਨਾਂ ਫੇਰੀ ਵੀ ਉਹ ਬਾਵਾ ਇਹਲੇ ਉਸ ਮਿਹਰੇ ਦੇ ਧੀਰੇ ਤਰਬਕਾਰ ਜੀ ਲਗੇ ਹੋਏ ਰਾਜੇ ਦਾ ਘਰ ਹੁੰਦਾ ਜੀ ਉਹਨਾਂ ਨੂੰ ਬਲਵਾਂ ਚਲਦੀ ਲੋੜ ਨਹੀਂ ਹੈ ਜਮਕਾਰ ਨੇ ਹਾਲੇ ਸਾਜ ਜਮਕਾਰ ਸਾਦੇ ਉਹਦੇ ਗੰਦੇ ਉਹ ਵੀ ਗਾ ਵੀ ਕਹਦੇ ਬੇਤਾਲੇ ਆ ਇਹ ਬੇਤਾਲੇ ਨੇ ਇਹਨਾਂ ਦਾ ਨਾਮ ਨਾ ਤਾਲਵੇਂ ਲਈ ਹੈ ਸੱਚ ਨਾਲ ਤਾਲਵੇਂ ਤੋਂ ਖੁਜੇ ਹੋਏ ਲੋਕ ਨੇ ਇਹ ਐਂਦੀ ਦੇਖਦੇ ਵੀ ਆ ਤੁਹਾਡੀ ਲੋਕ ਤਾਂ ਸਾਫ ਸਾਫ ਉੱਪਰ ਘਟੀ ਜਾਂਦੀ ਹੈ ਜਾਬ ਤੋੜੇ ਜ਼ੋਹ ਤੇ ਕਿਹਨੇ ਤੁਸੀ ਕੀ ਕਿੱਧਰ ਕਿਹੜੇ ਪਾਸੇ ਲੱਗੇ ਹੋਏ ਲਿਆ ਇਹ ਬਿਤਾਲੇ ਬੰਦੇ ਦੀ ਗੱਲ ਹੈ ਜੀ ਬਿਤਾਲਿਆਂ ਦੀ ਆਬ ਗੱਲ ਰਹੀ ਹੈ ਤਾਲ ਨਹੀਂ ਰਹਿਣਾ ਦੀ ਬਣੀ ਹੋਈ ਉਹਦੇ ਨੂੰ ਸੱਚ ਠੀਕ ਹੈ ਜੀ ਨਾਨਕ ਗੁਰ ਸ਼ਰਨਾਈ ਉਭਰੇ ਹਰ ਗੁਣ ਰਖਵਾਲਿਆ ਜਾਣੇ ਜਿਹੜੇ ਸਤਗੁਰ ਦੀ ਛਾਲ ਚਲੇ ਗਏ ਇਹ ਗਿਆਨ ਦੀ ਛਲ ਚਲੇ ਗਏ ਗਿਆਨ ਦੀ ਛਲ ਜਾਣ ਵਾਲੇ ਕੁਵਾਰ ਹੈ ਜਿਨ੍ਹਾਂ ਨੇ ਮੰਨ ਲਿਆ ਨਾ ਵੀ ਗਿਆਨ ਨਾਲ ਮਿਲਣਾ ਹੈ ਕਿਹੜੀ ਗੁਰਸ਼ੇ ਮਾਈ ਉਪਰੇ ਉਹ ਉਪਰ ਆ ਗਏ ਉਹਨਾਂ ਨੂੰ ਗਿਆਨ ਤੇ ਇਹਦਾ ਸੰਸਾਰ ਛੱਡ ਜਾਂਦਾ ਕਿਉਂ ਕੇ ਜਾਣੀ ਹੈ ਨਾਲ ਦਾ ਜਾਣਾ ਸਾਡੇ ਅਮਲਾ ਮੇਨ ਮੇਲੇ ਹੋੜਲੇ ਨਾ गुर ਗੁਰ ਸ਼ਰਨ ਆਈ ਉੱਭਰੇ ਹਰ ਗੁਰ ਰਖਵਾਲਿਆ ਜਦੋਂ ਕੰਨ ਜਿਹੜੇ ਹਰਗੁਰ ਦੀ ਸ਼ਰਨ ਆਈ ਆਗੇ ਉਹਨਾਂ ਨੂੰ ਭਪਸਾ ਕਰ ਤੋਂ ਬਾਹਰ ਦਾ ਹਿੱਸਾ ਦਿਖਣ ਲੱਗ ਗਿਆ ਵੀ ਬਾਹਰ ਕੁਝ ਹੈਗਾ ਤੇ ਮਾਇਆ ਜਾਣ ਤੇ ਬਾਹਰ ਵੀ ਕੁਝ ਹੈ ਉਹਨੂੰ ਸਭ ਸਮਝ ਆ ਗਈ ਚੱਚਖੰਡ ਵਗੈਰਾ ਦੀ ਸਮਝ ਠੀਕ ਹੈ ਉਹਨਾਂ ਦਾ ਹਰੇ ਗੁਰ ਬਣ ਗਿਆ ਹੈ ਜੀ ਹਾਂ ਉਹਦੇ ਗਿਆਨ ਨੇ ਬਚਾਇਆ ਨੇ ਹੋਰ ਹਰ ਗੁਰ ਦੇ ਗਿਆਨ ਨੇ ਬਚਾਇਆ ਨੇ ਠੀਕ ਹੈ ਜੀ ਇੱਥੇ 30ਵੀਂ ਪੌੜੀ ਦੀ ਸਮਾਪਤੀ ਹੈ ਜੀ